जो महला पहला कर नारायण सबा नाल पूज करे रखै नावाल कर नारायण नारायण का जी जद नारायण करा सब कुछ नारायण ने कर करता ते सब कुछ पूज करा ਰਖੇ ਨਵਾਲ ਜੇ ਕੋਈ ਪੂਜਾ ਕਰਦਾ ਹੈ ਜਾਰੇਂਦੀ ਉਹ ਵੀ ਉਹਨੂੰ ਸਾਫ ਸੁਥਰਾ ਨਿਵਾੜ ਕੇ ਰੱਖਦਾ ਹੈ ਕਿਉਂਕਿ ਉਹਦੇ ਤੇ ਮਲੀਨਤਾ ਦਾ ਦਾਗ ਨਹੀਂ ਪੈਣ ਦਿੰਦਾ ਬੰਨ ਉਹਦਾ ਤੋਤਾ ਰਹਿੰਦਾ ਘਰ ਵਿੱਚ ਹੀ ਨਾਲ ਰਹਿਣਾ ਜੇ ਹਾਂ ਉਹਦੀ ਪੂਜਾ ਕਰੇ ਉਹ ਵੀ ਨਿਵਾੜ ਕੇ ਰੱਖਦਾ ਇਹਨੂੰ ਸਾਫ ਸੁਥਰਾ ਰੱਖਦਾ ਠੀਕ ਹੈ ਜੀ ਉਹ ਭਰਮ ਤੋਂ ਦੂਰ ਰੱਖਦਾ ਹੈ ਜੀ ਹਾਂ ਭਰਮ ਤੋਂ ਦੂਰ ਠੀਕ ਹੈ ਨਾਰਾਇਣ ਦਾ ਭਾਵ ਪਰਮੇਸ਼ਰ ਤਾਂ ਨਹੀਂ ਕਿਉਂਕਿ ਆਮ ਨਾਰਾਇਣ ਪਰਮੇਸ਼ਰ ਵਾਸਤੇ ਵਰਤਦੇ ਆ ਲੋਕ ਇਹਦਾ ਮੂਲ ਹੈ ਨਾਰੈਣ ਜਿੱਥੇ ਪਰਬਦੀ ਹੈ ਉਹ ਨਾਰੈਣ ਹੁੰਦਾ ਜਿੱਥੇ ਅਗਿਆਨਤਾ ਦੀ ਉਹ ਨਾਰੈਣ ਠੀਕ ਹੈ ਜੀ ਨਾਰੈਣ ਦਾ ਭਾਵ ਹੈਗਾ ਹਨੇਰਾ ਨਾਰੈਣ ਦਾ ਮਤਲਬ ਨੇਰ ਉਹ ਲੋ ਇਹ ਚੜਾਏ ਉਚਰਾਉਂਦੇ ਨੇ ਨਾ ਹਾਂਜੀ ਉਹ ਮੂਰਤੀ ਦੇ ਚੜਾਉਂਦੇ ਨੇ ਹਾਂਜੀ ਪੈਣੀ ਪੈਤਾ ਬਹੁਤ ਮੰਗਾਏ ਪੈਣੀ ਪੈਤਾ ਬਹੁਤ ਬਣਾਉਂਦੇ ਨੇ ਹਾਂਜੀ ਮਾਣਵਾ ਮੰਗੀ ਮੰਗੀ ਪੈੰਨੇ ਖਾਏ ਅੰਦੀ ਕੰਮੀ ਅੰਧ ਸਜਾਏ ਜਿਹੜੇ ਬਾਹਾਰਾ ਕੰਮ ਕਰਦੇ ਨੇ ਇਹਨਾਂ ਦਾ ਬਾਹਾਰ ਹੈ ਕੀ ਹੈ ਮਾਣਵਾ ਮਾਣ ਕਰਦੇ ਨੇ ਪਗਦੇ ਨੇ ਮੰਗਤੇ ਨੇ ਮੰਗਤੇ ਮੰਗ ਮੰਗ ਮੰਗਵਾ ਕੇ ਪੈੰਦੇ ਗਾਨੇ ਅੰਦੀ ਕਮੀ ਹੁੰਦੇ ਸਈ ਅੰਦੇ ਕਮਾ ਨਾਲ ਸਜ਼ਾਈਂ ਮਿਲਣੀ ਆ ਨਹੀਂ ਰਹਜੂਗੇ ਅਖਾਲੇ ਨਹੀਂ ਹੋ ਸਕੇਗਾ ਨਾ ਹੋਂਦੀ ਸਜ਼ਾਈ ਆ ਤੁਹਾਨੂੰ ਅੰਲੀ ਹੋਊਗੀ ਹੀ ਸਜ਼ਾ ਤੁਹਾਨੂੰ ਗਿਆਨ ਹੋਣਾ ਹੀ ਨਹੀਂ ਅਸਲੀ ਦਰੈਣ ਦਾ ਗਿਆਨ ਨਹੀਂ ਹੋਣਾ ਇਹੀ ਸਜ਼ਾ ਬਥੇਰੀ ਆ ਅੰਦੀ ਕਮੀ ਉਹਦਾ ਸਜ਼ਾ ਆ ਰਹਿਣ ਦੀ ਸਜ਼ਾ ਬਹੁਤ ਆ ਤੁਹਾਨੂੰ ਹਰ ਜਨਮ ਚੰਦੇ ਯੰਮੂ ਗੇਂਦਾ ਹੀ ਰਹੋਗੇ ਅੱਖਾਂ ਬਲੀਆਂ ਹੀ ਨਹੀਂ ਤੁਹਾਨੂੰ ਮਰਦਿਆਂ ਰੱਖੈ ਅੰਦਾ ਝਗੜਾ ਅੰਦੀ ਸੱਥੈ ਅਗੇ ਭੁੱਖਾ ਕੀ ਖਾਏ ਜਿ ਬੀਜਿਓ ਪੱਤੇ ਹਾਲ ਨਾਮ ਬੀਜਿਓ ਕੇ ਅਗੇ ਭੁੱਖ ਲੱਗਣੀ ਕਿਸੇ ਨੇ ਦੇਣਾ ਕੁਛ ਆਣ ਦੂ ਪੱਲੇ ਖਾਲੇ ਨਾ ਮਰਦਾ ਜਮਲ ਲਾਉਣਾ ਨਾ ਉਹਨੇ ਬਚਾਉਂਦੇ ਜੋ ਮਰਦਾ ਰੱਖੈ ਅਰਦੇ ਨੂੰ ਬਚਾਉਣਾ ਨਹੀਂ ਕਿਸੇ ਨੇ ਰਾਖੀ ਨਹੀਂ ਕਰਦੀ ਅੰਦਾ ਝਗੜਾ ਬੁੱਧੀ ਸਥਾ ਆ ਝਗੜਾ ਵੀ ਆ ਨਿਆ ਦਾ ਝਗੜਾ ਨਿਆ ਦਾ ਕੌਣ ਲਈ ਪਰਤ ਮੁਲਾ ਜੋ ਲਿਖਦੀ ਆ ਛੱਡ ਨਾ ਲੀਆ ਕਬੀਰ ਇਹ ਵਿਦਵਾਨਾਂ ਦੇ ਝਗੜੇ ਨੇ ਵਿਦਵਾਨਾਂ ਦੇ ਝਗੜੇ ਤੋਂ ਦੂਰ ਰਹੀਦਾ ਇਹ ਦਾਸ ਤੇ ਅੱਗੇ ਝਗੜਾ ਪਾਉਂਦੇ ਹੁੰਦੇ ਨੇ ਵਿਦਵਾਨ ਨਾਮ ਤੇ ਆ ਕੇ ਨਹੀਂ ਉਹਨਾਂ ਦੇ ਪੈਰ ਰੜਦੇ ਇੱਥੇ ਨਹੀਂ ਉਹ ਹਉਂਦੇ ਬੂਰੇ ਜੇ ਨਾਮ ਦੀ ਤੁਸੀਂ ਗੱਲ ਕਰ ਸਕਦੇ ਹੋ ਕਰਦੇ ਹੋ ਵਿਦਵਾਨ ਹਉਰੇ ਹਉਂਦੇ ਹੀ ਦੀ ਪਤਾ ਵੀ ਖਾਂਢੇ ਫਸਾ ਲਉਂਦੇ ਗੱਲ ਹੋ ਰਹੀ ਹੈ ਜਿਹੜੇ ਮਣੂਆ ਮੰਗ ਮੰਗ ਪੈਨੇ ਖਾਏ ਉਹਨਾਂ ਦੇ ਨਾਲ ਇਸ ਤਰ੍ਹਾਂ ਹੋਊਗੀ ਹਾਂ ਜੀ ਆਪਣੇ ਦੀ ਬਣਾਵਣਾ ਦੇ ਸੋਸਾਇਟੀਆਂ ਬੱਕੀ ਜਾਂਦੇ ਕਿਹੜਾ ਰੈਡੀਓ ਤਿਆਰ ਕੀਤਾ ਹੈ ਕਿ ਇਹਦਾ ਕੁਝ ਪੈਸੇ ਬੰਗੋ ਸਾਨੂੰ ਪੈਸੇ ਚਾਹੀਦੇ ਨੇ ਬੰਕੇ ਖਾਣੇ ਵਾਲੀ ਉਹ ਗੱਲ ਹੈ ਉਹ ਬਹਾਨੇ 100 ਤਰ੍ਹਾਂ ਦੇ ਬਣਾ ਲੈਂਦੇ ਬੰਗਲ ਬਣਾ ਲੈਂਦੇ ਠੀਕ ਹੈ ਪਰ ਜਿਹੜੇ ਘਰ ਨਾਰਾਇਣ ਸੱਬਾ ਨਾਲ ਪੂਜ ਕਰੇ ਰੱਖਿਆ ਕੈਟਾਗਰੀ ਹੈ ਉਹਦੇ ਦਾ ਸਭ ਘਰੇ ਹੈ ਉਹਨੇ ਕੀ ਲੈਣ ਠੀਕ ਹੈ ਜੀ ਉਹ ਤੋਂ ਨਾਰਾਇਣ ਤੋਂ ਹੀ ਮੰਗ ਲੈਣੇ ਜਿਹੜੀ ਚੀਜ਼ ਦੀ ਲੋੜ ਲੋੜੇ ਨਹੀਂ ਹੈ ਘਰੇ ਸਭ ਕੁਝ ਹੈ ਘਰਤਲ ਤੇ ਸਭ ਕੁਝ ਹੈ ਜਿੱਥੇ ਨਾੜ ਬੈਠਾ ਉੱਤੇ ਸਭੂ ਜਾਂ ਨਾਲ ਹੀ ਹੈ ਮੇਰੇ ਕੋਲ ਸਭ ਕੁਝ ਦੇਵ ਸੀ ਠੀਕ ਹੈ ਜੀ ਹਾਂ ਜੀ ਮਹੱਲਾ ਪਹਿਲਾ ਸਭੇ ਸੁਰਤੀ ਜੋਗ ਸਭ ਸਭੇ 베ਦ ਪੁਰਾਣ ਸਭੇ ਕਰਨੇ ਤਪ ਸਭ ਸਭੇ ਗੀਤ ਗਿਆਨ ਸਭੇ ਸੁਰਤੀ ਜੋਗ ਸਭ ਇੱਥੇ ਕੋ ਮਾਊਗਾ ਸਭੇ 베ਦ ਪੁਰਾਣ ਸੱਬੇ ਸੁਰਤੀ ਸੁਰਤੀਆਂ ਲਾਉਂਦੇ ਨੇ ਧਿਆਨ ਲਾਉਣੇ ਵਾਲੇ ਕਈ ਕਿਸਮ ਦੇ ਯੋਗ ਨੇ ਸਾਰੇ ਯੋਗ ਯੋਗ ਧਿਆਨੀ ਦੇ ਜਿਹੜੇ ਸੱਬੇ 베ਸਪੁਰਾਂ ਦੇ ਆ ਗਏ ਸਭ ਸੱਬੇ ਗੀਤ ਗਿਆਨ ਜਿਹਨੇ ਗੀਤ ਗਿਆਨ ਦੇ ਲੋਕਾਂ ਨੇ ਗਾਏ ਨੇ ਅਨੁਮਾਨ 40000 ਸਾਰ ਹੋਰ ਬਹੁਤ ਕੁਝ ਵਿਜਨੂ ਦੀ ਉਸ ਤੇ ਇਹ ਵਿਚਰ ਪਾ ਨੇ ਇਹ ਗੀਤ ਗਿਆਨ ਗਿਆਨ ਗੀਤ ਸਾਰੇ ਆਗੇ ਹਾਂਜੀ ਸਬੇ ਬੁੱਧੀ ਸੁਧ ਸਬੇ ਬੁੱਧੀ ਸੁద్ధి ਸ਼ਬ ਸਭ ਤੀਰਥ ਸਭ ਥਾਨ ਸਭ ਪਾਤਸ਼ਾਹੀਆਂ ਅਮਰ ਸਭ ਸਭ ਖੁਸ਼ੀਆਂ ਸਭ ਖਾਨ ਸਬੇ ਬੁੱਧੀ ਸਾਰੀ ਗ੍ਰਸਮਦੀਆਂ ਬੁੱਧੀਆਂ ਸੁਧੀਆਂ ਸੋਝੀਆਂ ਸਭ ਸਭ ਥੀਥ ਸਾਰੇ ਥੀਥ ਸਭ ਥਾਨ ਸਾਰੇ ਥਾਨ ਅਸੀਂ ਵੀ ਬਥੇਰੇ ਪਣਾਲੇ ਥਾਨ ਹੁਣ ਸਭ ਪਾਸ਼ਾਈਆਂ ਬੜੀਆਂ ਹਰਗੇ ਸੁਣਦੀਆਂ ਪਾਸ਼ਾਈਆਂ ਨੇ ਕੀਰਤਾਂ ਦੇ ਉੱਤੇ ਵੀ ਨੇ ਔਰ ਵੈਸੇ ਵੀ ਰਾਜੇ ਨੇ ਆਬਰ ਸਭ ਹੁਕਮ ਅਬਰ ਦਾ ਤੇ ਅਰਦਾ ਹੁਕਮ ਪਾਸ਼ਾਈਆਂ ਅਬਰ ਸਭ ਸਾਰੇ ਹੁਕਮ ਸਭ ਖੁਸ਼ੀਆਂ ਸਭ ਖਾਂ ਸਾਰੀਆਂ ਖੁਸ਼ੀਆਂ ਸਾਰੇ ਜਿਨੇ ਆਪਣੇ ਆਪ ਨੂੰ ਕਹਉਂਦੇ ਨੇ ਹਾਂਜੀ ਅੱਛਾ ਇੱਥੇ ਜਿਹੜੀਆਂ ਬੁੱਧੀ ਦਾ ਠੀਕ ਹੋ ਗਿਆ ਸੱਬੇ ਬੁੱਧੀ ਦਾ ਹੋ ਗਿਆ ਪਲੂਰਲ ਪਰ ਸੁਧ ਦੇ ਨਾਲ ਸਭ ਸਿਆਰੀ ਨਾਲ ਪਲੂਰਲ ਬਣ ਜਾਂਦਾ ਸੁਧੀ ਹਰ ਕਿਸਮ ਦੀ ਸੋਜੀ ਸਾਰੀਆਂ ਸੋਜੀਆਂ ਹਰ ਕਿਸਮ ਦੀ ਸੋਜੀ ਠੀਕ ਹੈ ਜੀ ਹਾਂਜੀ ਸੱਬੇ ਮਾਨਸ ਦੇਵ ਸਭ ਸੱਬੇ ਜੋਗ ਧਿਆਨ ਸੱਬੇ ਪੁਰੀਆਂ ਖੰਡ ਸਭ ਸੱਬੇ ਜੀ ਜਹਾਨ ਹਾਂ ਸਾਰੇ ਆਦਮੀ ਆਗੇ ਵਿੱਚ ਦੇਵ ਆਗੇ ਦੇਵਤਾਂ ਦੇ ਨੂੰ ਕਹਿੰਦੇ ਨੇ ਜਿਹੜਾ ਇਹ ਹਸਰੇ ਜਿਉਂਦਾ ਉਹ ਦੇਵ ਹੁੰਦਾ ਪੁਰੀਆਂ ਬਣਾਈ ਬੈਠੇ ਨੇ खंड सब जिने हो टुकड़े ने जमीन दे जज़ीरे वगैरह दे सबे जी जहान सारे जी आके जिने संसार दे दे सबे जी जहान हुक्मी चलाए अपना करमी वह कलाम नानक सच्चा सच सच्च नाए सच सभा दीवान हुक्मी चलाए अपने करवी वह कलाम ਸਾਰੇ ਆਨੂੰ ਆਪਣੇ ਹੁਕਮ ਚ ਚਲਾ ਰਿਹਾ ਹੈ ਪਰਮੇਸ਼ਰ ਸਾਰੇ ਉਹਦੇ ਹੁਕਮ ਚ ਚਲਦੇ ਨੇ ਕਰਮੀ ਬਹ ਕਲਾਂ ਉਹਦੀ ਕਿਰਪਾ ਦੀ ਉਹ ਕਲਪ ਚਲਦੀ ਹੈ ਕਿਰਪਾ ਕਰਮੀ ਕਿਰਪਾ ਕਿਰਪਾ ਦੀ ਗੱਲ ਕਿਰਪਾ ਸਭ ਦੇ ਸਾਰਿਆਂ ਨੂੰ ਖਾਣ ਨੂੰ ਦਿੰਦਾ ਨੂੰ ਦਿੰਦਾ ਹੈ ਮਤਲਬ ਕਲਪ ਦੀ ਇਹ ਕਲਾ ਦਾ ਮਤਲਬ ਹੁਕਮ ਠੀਕ ਹੈ ਜੀ ਨਾਨਕ ਸੱਚਾ ਸੱਚਾ ਨਾਨਕ ਕਹਿੰਦਾ ਆਪ ਸੱਚਾ ਨਿਯਮ ਵੀ ਉਹਦਾ ਸੱਚਾ ਇਨਸਾਨ ਵੀ ਸੱਚਾ ਅਧਾਰਤ ਹੈ ਹਰ ਹਰ ਰਸਾਬ ਸਾਚ ਉਤੇ ਅਧਾਰਤ ਹੈ ਸੱਚ ਸਭਾ ਦੀਵਾਨ سارے ਦੀਵਾਨ ਦੇ ਲੋਕ ਬੈਠੇ ਹੁੰਦੇ ਸਭ ਸੱਚੇ ਜਿੁੱੱਚੇ ਇੱਕ ਵੀ ਝੂਠਾ ਆਦਮੀ ਉੱਥੇ ਬਹਿ ਨਹੀਂ ਸਕਦਾ ਸੱਚ ਦੀ ਸਭਾ ਹੋ ਗੁਰਮਖਾਂ ਦੀ ਸਭਾ ਹੋ ਠੀਕ ਹੈ ਜੀ ਇਹ ਸੱਚਖੰਡ ਦੀ ਗੱਲ ਹੋ ਰਹੀ ਹੈ ਜੀ ਹਾਂ ਜੀ ਹਾਂ ਦੀ ਗੱਲ ਉਹ ਕੋ ਮੋਤੇ ਆਉਣਾ ਠੀਕ ਹੈ ਜੀ ਪੌੜੀ ਨਾਇ ਮੰਨਿਆ ਸੁਖ ਉਪਜੈ ਨਾਮੇ ਗਤੀ ਹੋਈ ਨਾਇ ਮੰਨਿਆ ਪਤ ਪਾਈਐ ਚਿਰਦਾ ਹਰਸ ਹੋਈ ਜੇ ਨਾਮ ਨੂੰ ਮੰਨ ਲਈਏ ਕੁਰਬਾਨੀ ਸੱਚ ਨੂੰ ਮੰਨ ਲਈਏ ਨਾਮੋ ਗੱਟ ਹੋਈ ਇਹਦੇ ਬੁੱਧੀ ਅੱਗੇ ਚੱਲ ਪੈਂਦੀ ਹੈ ਬੁੱਧੀ ਸੰਸਾਰ ਤੋਂ ਉੱਚੀ ਉੱਡ ਜਾਂਦੀ ਹੈ ਸੰਸਾਰ ਦੀ ਕਿੰਨੀ ਵੀ ਕੋਵਤवान ਹੋਵੇ ਤੋ ਬਾਹਰ ਨਿਕਜੋਗੇ ਤੁਸੀਂ ਕੋਈ ਆਦਮੀ ਮੁਕਾਬਲਾ ਨਹੀਂ ਕਰ ਸਕਦਾ ਸੰਸਾਰ ਦਾ ਬੁੱਧੀ ਦਾ ਜੇ ਗੁਰਬਾਨੀ ਦੇ ਪਹਿਲੀ ਪੌੜੀ ਤੇ ਵੀ ਪੈਰ ਧਰ ਲਵੇ ਨਾ ਮੰਨੀ ਜੇ ਮੰਨ ਲਈਏ ਇੱਜ਼ਤ ਵਰਦੀਏ ਸੰਸਾਰ ਚ ਸੱਚੇ ਹਾਲ ਤੱਕ ਕਰੇ ਜਹਾਨ ਹਿਰਦੇ ਹਰ ਸੋਈ ਹਿਰਦੇ ਦੇ ਵਿੱਚ ਤਾਂ ਹਰਾਪੇ ਹੀ ਬੈਠਿਆ ਸਾਰਿਆਂ ਦੇ ਹਿਰਦੇ ਵਿੱਚ ਹਾਰ ਹੈ ਹਰ ਫੈਸਲਾ ਕਰਦਾ ਵੀ ਹਾਂ ਇਹ ਆਜ ਠੀਕ ਹੈ ਹਾਂਜੀ ਨਾਇ ਮੰਨੀਏ ਪਵਜਲ ਲੰਗੀ ਹੈ ਫਿਰ ਬਿਗਨ ਨਾ ਹੋਈ ਨਾਇ ਮੰਨੀਏ ਪੰਥ ਪ੍ਰਗਟਾ ਨਾਮੇ ਸਭ ਲੋਈ ਨਾਇ ਮੰਨੀਏ ਪਵਜਲ ਲੰਗੀ ਹੈ ਨਾਮ ਨੂੰ ਜੇ ਬੰਨ ਲੀਏ ਪਵਜਲ ਪਾਰ ਹੋ ਜਾਈਦਾ ਪਵਜਲ ਦੇ ਵਿੱਚ ਅੜਕਾ ਹੀ ਨਹੀਂ ਮੜਦਾ ਕੁਝ ਪਵਜਲ ਕੁਝ ਨਹੀਂ ਕਹਿ ਸਕਦਾ ਪਵਜਲ ਅੱਗੇ ਢੇਰਦਾ ਹੀ ਦੀ ਨਾਇ ਮੰਨੀਏ ਪਵਜਲ ਹੁੰਦੀ ਹੈ ਫਿਰ ਬਿਗਨ ਨਾ ਹੋਈ ਕੋਈ ਬਿਗਨ ਪੈ ਨਹੀਂ ਸਕਦਾ ਪਵਜਲ ਤਰਨ ਦੇ ਵਿੱਚ ਨਾਇ ਮੰਨੀਏ ਪੰਥ ਪ੍ਰਗਟਾ ਜਿਹਨਾਂ ਨਾਮ ਮੰਨਦੇ ਆ ਉਹਨੂੰ ਪੰਥ ਪ੍ਰਗਟ ਹੋ ਜਾਂਦਾ ਹੈ ਉਹਨੂੰ ਦਾ ਰਸਤਾ ਪ੍ਰਗਟ ਸਾਫ ਦੀਦਾ ਹੈ ਨਾਮ ਦੇ ਸਭ ਲੋਈ ਨਾਮ ਨਾਲ ਨਾਨਕ ਸਤ ਮਿਲਿਆ ਨਾਉ ਦੇਵੇ ਸੋਈ ਨਾਨਕਾਂ ਦਾ ਸਤ ਗੁਰੂ ਮਿਲਿਆ ਨਾਉ ਬੋਲੀ ਦਾ ਗਿਆਨ ਮਿਲ ਜੇ ਤਾਂ ਨਾਉ ਬੋਲੀ ਕੋਈ சதਗੁਰ ਮਿਲ ਜੇ ਫਿਰ ਸਾਡਾ ਗਿਆਨ ਦੇ ਦੇਵੇ ਫਿਰ ਨੋਖ ਜਾ ਸਕਦਾ ਹੈ ਹਨਨਿਤ ਜਿਹਨ ਦੇਵਾ ਸੋਈ ਜਿਹਨ ਪਰਮੇਸ਼ਰ ਦਵੇ ਆਪ ਪਰਮੇਸ਼ਰ ਦਵੇ ਤਾਂ ਹੀ ਇਹ ਗੱਲ ਸਬਬ ਹੈ ਕਿ ਪਰਮੇਸ਼ਰ ਜੋੜ ਲੈਣਾ ਹਲਾਵੇ ਫਿਰ ਗੱਲ ਸਬਬ ਬਣਦੀ ਹੋ ਸਮਾਪਤੀ ਹੈ ਜੀ